ਸ਼ਲੋਕ ਮਹੱਲਾ ਤੀਜਾ ਕਲਮਹ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉੱਭਰੇ ਮਨ ਮੁੱਖਾਂ ਦੇ ਸਜਾਏ ਕਲਜੋ ਦੇ ਵਿੱਚ ਕੀ ਹੈ ਉਹ ਜੰਦਾਰ ਕਹਿੰਦੇ ਨੇ ਜਮ ਜੰਦਾਰ ਤੂੰ ਆ ਜਾਏ ਪਿੰਜਰੇ ਜੋਵੇ ਬਿੱਲਾ ਬਾਹਰ ਬੈਠਾ ਇਹਨੂੰ ਡਰਦਾ ਹੀ ਜਾਂਦਾ ਇਹ ਜਮ ਜੰਦਾਰ ਹੈ ਕਲਜੋ ਦੇ ਵਿੱਚ ਜੇ ਕਲਜੋ ਵਿੱਚ ਕਹਿੰਦਾ ਫਿਰਲਾ ਵੀ ਬਾਹਰ ਬੈਠਾ ਦਿੰਦਾ ਇਹ ਕਲਪਨਾ ਛੱਡ ਦਈਏ ਬਿੱਲਾ ਗਾਇਬ ਹੋ ਜਾਂਦਾ ਹੈ ਛੱਡ ਕੇ ਚਲਾ ਜਾਂਦਾ ਫਿਰ ਉਹ ਬੈਠਾ ਬਿੱਲਾ ਹਰ ਦੇ ਵਿੱਚ ਜਾਂਬੋਦ ਬੁੱਤ ਜਾਂ ਤੂੰ ਮੇਰਾ ਸ਼ਿਕਾਰ ਠੀਕ ਹੈ ਕੰਮ ਤੋਂ ਭਾਵ ਕੀ ਹੈਗਾ ਭਰਮ ਦੀ ਗੱਲ ਹੋ ਰਹੀ ਹੈ ਪਰ ਹੋਰ ਕੀ ਹੈ ਜਮ ਭਰਮ ਕਰਕੇ ਕਾਲ ਬਿੱਲਾ ਬੈਠਾ ਹੈ ਉਹ ਉਹ ਮੇਰੇ ਜੀ ਬੰਲਾ ਦੀਨ ਆ ਉਹੀ ਬੈਠਾ ਬੰਲਾ ਕਾਨੂੰ ਕਿਤੇ ਬੈਠਾ ਕੋਈ ਅੱਛਾ ਜੀ ਪਰ ਪਰ ਵਿਚ ਆਪਨ ਨੂੰ ਤਲਾਗ ਲੈਣੇ ਪਰ ਲਾਈਟ ਆਫ ਹੋ ਕੇ ਡਲਣ ਲੱਗ ਜਾਂਦੇ ਨੇ ਅਤਰੋਈ ਗੱਲ ਪੈਦਾ ਜਾਂਦਾ ਕੋਈ ਪੈਦਾ ਹੋਣ ਲੱਗ ਜਾਂਦੀ ਹੈ ਜੈ ਜੈ ਸੋੜੀ ਠੀਕ ਹੈ ਕਾਰ ਕਮਾਈ ਇਸ ਕਰਕੇ ਅਸੀਂ ਜਵਨਦਾਰ ਸੀਗਾ ਅਸੀਂ ਤਾਂ ਹੁਕਮ ਦੇ ਵਿੱਚ ਰਹੇਗੇ ਕਾਰ ਕਮਾਈ ਹੈ ਨੇ ਅਸੀਂ ਕਮਾਈਏ ਕਿ ਜਮ ਜੰਦਾਰ ਹੁਕਮਚਕਾਰ ਕਮਾਈ ਆ। ਨਹੀਂ ਨਹੀਂ ਜਮ ਜੰਦਾਰ ਹੁੰਦਾ ਹੈ ਕਾਲ ਯੁਗ ਦੇ ਵਿੱਚ ਪਰ ਹੁਕਮਚਕਾਰ ਕਮਾਈ ਦੀ ਹੈ ਜਦ ਆਪ ਜਮ ਅਲ ਨਹੀਂ ਦੇਖੀ ਜਾਂ ਉਦੋਂ। ਮਨਮੁਖਾਂ ਦੇ ਸਜ਼ਾਈ। ਬਸ ਜਿਹੜੇ ਗੁਰ ਰਾਖੇ ਉਹ ਜੰਦਾਰ ਤੋਂ ਜਮ ਜੰਦਾਰ ਤੋਂ ਉਬਰੇ। ਮਨਮੁਖਾਂ ਸਿੱਧੇ ਫਿਰ ਬੈਠਈਏ ਉਹ। ਉਹ ਮਨੁੱਖਾਂ ਵਾਸਤੇ ਹੈ ਜਦੋਂ ਜੰਦਾਲ ਗੁਰਮੁਖਾਂ ਵਾਸਤੇ ਨਹੀਂ ਹੈ ਜਿਹੜਾ ਬਦੀ ਹੋ ਗਿਆ ਹਾਂਜੀ ਜਿਹੜੇ ਚੋਂ ਉਹਦੇ ਖਾਤੇ ਜਿਹੜੇ ਅਫਸਰ ਫਿਰ ਅਫਸਰ ਥੋੜੀ ਬਦਲ ਗਿਆ ਉਹ ਨਹੀਂ ਪਰ ਜਿਹੜੇ ਅਬਰਾਦੀ ਨੇ ਉਹਨਾਂ ਦਾ ਟ੍ਰੈਂਟ ਹੋਰ ਬੋਲੀਓ ਬਦਲ ਜਾਂਦੀ ਉਹਨਾਂ ਵਾਸਤੇ ਜਿਹੜਾ ਛੁੱਟ ਗਿਆ ਬਾਇਜ਼ਤ ਬਰੀ ਜੀ ਨੂੰ ਕਹਿੰਦਾ ਬਾਇਜ਼ਤ ਬਰੀ ਹੈ ਉਦੋਂ ਨੂੰ ਇੱਜ਼ਤ ਨਾਲ ਬਾਹਰ ਕੱਢਦੇ ਨੇ ਠੀਕ ਹੈ ਜੀ ਜਮ ਕਾਲ ਐ ਬਸ ਜਗ ਬੰਦਿਆ ਤਿਸ ਕਾ ਫਰੂ ਨਾ ਕੋਈ ਜਿਹੜਾ ਜੱਗ ਬਣਿਆ ਹੋਇਆ ਜਮ ਕਾਲ ਦੇ ਬਸ ਬਣਿਆ ਹੋਇਆ ਉਹ ਲੈਲੇਚ ਬਣਿਆ ਹੋਇਆ ਗਿਆਨਤਾਚ ਬਣਿਆ ਹੋਇਆ ਹੋਰ ਕਾਹ ਚੀ ਨਹੀਂ ਬਣਿਆ ਹੋਇਆ ਜਮ ਕਾਲ ਇਹਨੂੰ ਉਹ ਗਿਆਨਤਾ ਕਹ ਲਿਆ ਕਰੋ ਤੁਸੀਂ ਭਈਆ ਗਿਆਨਤਾਚ ਬਣਿਆ ਹੋਇਆ ਤਿਸ ਫਰੂ ਨਾ ਕੋਈ ਇਹਦੇ ਜਲਾਉਣ ਹੈ ਨਹੀਂ ਇਹ ਨਾਲ ਵਾਲੀ ਵਾਰਸੇ ਦੀ ਕੋਈ ਠੀਕ ਹੈ ਜੀ ਜਿੰਨ ਜੰਮ ਕੀਤਾ ਸੋ ਸੇਵੀ ਗੁਰਮੁਖੀ ਦੁੱਖ ਨਾ ਹੋਏ ਜਿਹਨੇ ਜੰਮ ਪੈਦਾ ਕੀਤਾ ਜੇ ਉਹਦੀ ਸੇਵਾ ਕਰੀਏ ਫੇ ਗੁਰਮੁਖ ਦਾ ਦੁੱਖ ਕੱਢ ਫੇ ਦੁੱਖ ਨਹੀਂ ਹੁੰਦਾ ਕੋਈ ਠੀਕ ਹੈ ਜੀ ਪਰ ਜੰਮ ਦਾ ਭਾਵ ਆਪਾਂ ਕੋਈ ਇੱਥੇ ਭਰਮੇ ਲਾਵਾਂਗੇ ਕੋਈ ਉੱਥੇ ਸ਼ਖਸੀਅਤਾਂ ਵਿੱਚ ਭਰਮ ਠੀਕ ਹੈ ਜੀ ਜੋਤ ਦੀ ਅਨਹੂਦਾ ਨੂੰ ਭਰਮ ਕੁਛ ਨਹੀਂ ਹੈ ਪਰ हां ठीक है जित्ते नेरा उठे भरम है ओही जम है बाद कोई हो गैरा जड़ी लाइट दी ज्योत दी गैरा जड़ी दानु भरम ठीक है जी जिन जम कीता सो सेविए गुरमुखि दुख ना होए जिने जम कीता बनाया ਕੋਈ ਤੇ ਦੂਰੇ ਹੱਥ ਹੋ ਜਾਣੇ ਗਿਆਨ ਨਾਲ ਜਾਨਨ ਕੋ ਗੁਰਮੁਖੀ ਜਪ ਸੇਵਾ ਕਰੇ ਜਪ ਦੀ ਸੇਵਾ ਗੁਰਮਕੜੇ ਤੇ ਜੰਗ ਗੁਰਬੁਧੀ ਸੇਵਾ ਕਰੇ ਉਹ ਜਪਦਾ ਗੁਰਬੁਧੀ ਸੇਵਾ ਕਰਦਾ ਗਿਆਨੀ ਅਰਥ ਕੋਟੇ ਵੀ ਕਰ ਸਕਦੇ ਨੇ ਇਥੋਂ ਉਹ ਜੰਪੀ ਸੇਵਾ ਹੀ ਕਰਦਾ ਕਿਸਬ ਦੀ ਗੁਰਮਖਾਨੀ ਕਰਦਾ ਸੇਵਾ ਜਪ ਦੀ ਸੇਵਾ ਦਾ ਪਰਮ ਗਿਆਨੀ ਕਰਦੇ ਨੇ ਪਰਮ ਗਿਆਨੀ ਗੁਰਮੁਖ ਜਪੁਤੀ ਸੇਵਾ ਦੀ ਕਰਦੇ ਸੇਵਾ ਗੁਰਬਖਾਂ ਦੀ ਜੁਬ ਕਰਦਾ ਉਹ ਕਿਹੜੇ ਭਾਵ ਚ ਕਰਦਾ ਕਿਵੇਂ ਕਰਦਾ ਜਬ ਨਹੀਂ ਜੇ ਜਾਮਾ ਜਬ ਗੁਰ ਜਪ ਕੇ ਜੰਮ ਦਾ ਮਤਲਬ ਦਾ ਗਿਆਨ ਤਾਂ ਫਿਰ ਗਿਆਨ ਤਾਂ ਗੁਰਮੁਖਾਂ ਦੀ ਸੇਵਾ ਕਿਵੇਂ ਕਰੂ ਮਨ ਨੂੰ ਨਾ ਰੈਸਟ ਕਰ ਲੰਦਾ ਗੁਰਮੁਖ ਵੀ ਉਹ ਨਾ ਰੈਸਟ ਕਰ ਲੰਦਾ ਦੇ ਇਹਨੂੰ ਰੈਸਤੀ ਨੀ ਅੰਦਰ ਲੈ ਜੇ ਤੁਮ ਰੈਸਤੀ ਕਰਨਾ ਬੰਦ ਬੁਨਦੀ। ਜਿਹੜਾ ਆਤੀ ਬੱਚਾ ਹੋਵੇ ਮਾਣੇ ਨੂੰ ਸੁਭਾਲਣਾ ਹੋਵੇ ਜਿੰਨਾ ਜੇ 2 ਘੰਟੇ ਸੂਝਵੇ ਉਹਨੂੰ ਸ਼ਾਂਤੀ ਆ ਜਾਂਦੀ ਬਾਹਰ ਉਹਦੇ ਚ। ਹੋ ਤਾਂ ਸੇਵਾ ਕਰਦਾ ਹੀ ਹੈ ਤੇ ਰਾਜੀ ਸੇਵਾ ਕਰਦਾ। ਤੇਰੇ ਤੇ ਨਾਮ ਹੀ ਚੱਲਣਾ ਹੈ ਸੰਸਾਰ ਦੇ ਵਿੱਚ ਬਨਸਪਤੀਆਂ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਨਾ ਇਹਦਾ ਵੀ ਜ਼ਰੂਰੀ ਹੈ ਇਹਦੇ ਵਿੱਚ। ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹਨ ਮੁਖ ਬੁਰਮਖਾ ਵਿਰੋਧੀ ਹਾਂਜੀ ਜੇ ਜਾਮਾ ਗੁਰਮੁਖ ਤੇ ਪ੍ਰਹਾਰ ਕਰਦਾ ਤਾਂ ਗੁਰੂ ਕਰਦਾ ਦਾ ਦੁਸ਼ਮਣ ਵਿਰੋਧੀ ਹੈ ਜੇ ਜਾਮਾ ਖਾਰ ਕਰਦਾ ਹੈ ਗੁਰਮੁਖ ਨੂੰ ਤਾਂ ਗੁਰਮੁਖ ਦੀ ਸੇਵਾ ਕਰਦਾ ਕਿਹੜੀ ਪੱਖੋਂ ਸੇਵਾ ਕਰਦਾ ਇਹ ਦੱਸੋ ਤੁਹਾਡੇ ਗਿਆਨ ਚ ਵਾਧਾ ਕਰ ਰਹੇ ਹੋ ਪ੍ਰਥਵੀ ਹੈ ਉਹਦੀ ਸੇਵਾ ਕਰਦਾ ਜੇ ਉਹਨੂੰ ਦੁੱਖ ਲੰਦਾ ਗੁਰਮੁਖ ਤੋਂ ਹਟੋ ਕੇ ਚੈਨਵਾਸ ਆ ਜਾ ਬਿਲ ਗਈ ਹੈ ਗੁਰਮੁਖ ਨੂੰ ਤਾਂ ਕੋਈ ਨਹੀਂ ਉਹਨੂੰ ਚੇਤਾ ਕਰਉਗੇ ਗੁਰਮੁਖ ਤੋਂ ਦੁੱਖ ਤੋਂ ਬਚ ਜਾਂਦਾ ਕੀ ਸੇਵਾ ਜਿਹੜੀ ਗੁਰਮਖ ਨੇ ਆਪਣਾ ਮੂੰਹ ਨਹੀਂ ਗੱਲ ਕਹਿਣੀ ਉਹ ਜਦ ਜ਼ਿੰਦਾਰ ਨੂੰ ਸਮਝਾ ਰਹੇ ਠੀਕ ਹੈ ਸਾਨੂੰ ਤਾਂ ਕੁਝ ਨਹੀਂ ਕਹਿ ਰਿਆ ਜੇ ਜਦ ਸਰਾਨੂੰ ਕੋ ਯਾਰ ਯਾਰ ਸਾਡੇ ਵਾਸਤੇ ਜਮ ਨਹੀਂ ਹੈ ਜਮ ਉਹਨਾਂ ਵਾਸਤੇ ਜਮ ਜਮ ਉਹਦੇ ਵਾਸਤੇ ਖਿਲਾਫ ਹੈ ਸਾਡੇ ਵਾਸਤੇ ਜਮ ਜਮ ਨਹੀਂ ਉਹਨਾਂ ਵਾਸਤੇ ਜਮੂਗਾ ਜਿਹਨਾਂ ਦੇ ਖਿਲਾਫ ਹੈ ਪਰ ਇੱਥੇ ਖਿਲਾਫ ਕੀ ਦੇ ਹੈ ਗੁਰਮੁਖ ਤਾਂ ਹੈਗਾ ਜਿਹਦੇ ਮਨ ਚ ਸੱਚਾ ਵਸਿਆ ਹੋਇਆ ਉਹਦੇ ਖਿਲਾਫ ਤਾਂ ਜਮ ਨਹੀਂ ਫੇ ਸੇਵਾ ਕਿਵੇਂ ਕਰ ਰਿਹਾ ਉਹਦੀ ਉਹਦੇ ਹੱਕ ਜਾਂ ਦੁਸ਼ਮਣਾਂ ਨੂੰ ਮਾਰ ਰਿਹਾ ਉਹਦੇ ਦੁਸ਼ਮਣਾਂ ਦੇ ਖਿਲਾਫ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਦਬਾਰ ਰਿਹਾ ਦੁਸ਼ਮਣਾਂ ਨੂੰ ਕਮਜ਼ੋਰ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਕੈਦ ਕਰਕੇ ਰੱਖਦੇ ਆ ਠੀਕ ਹੈ ਇਸ ਪੱਖੋਂ ਆਪਾਰਥ ਲਾਵਾਂਗੇ ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਇਹ ਹਾ ਸ਼ਬਦ ਹੈ ਦੁੱਖ ਹਮੈ ਰੋਗ ਨਾ ਜਾਏ ਇਹ ਕਾਇਆ ਨਾ ਰੋਗੀ ਭਰੀ ਹੈ ਰੋਗਾ ਭਰੀ ਹੋਈ ਕਾਇਆ ਹਾਂਜੀ ਰੋਗਾ ਨਹੀਂ ਭਰੀ ਹੋਈ ਹੈ ਜਿਹਨੂੰ ਉਪਦੇਸ਼ ਦੇ ਕਾਇਆ ਦੇ ਰੋਗ ਦੂਰ ਹੋ ਜੇ ਬੇਨਗੁਰ ਮਾਰਦੀ ਸੋਜੀ ਦੇ ਕਾਇਆ ਦੇ ਰੋਗ ਨਹੀਂ ਹਟ ਸਕਦੇ ਦੂ ਤੈਦੀ ਪੈ ਸਕਦੇ ਇਹਾ ਕਾਇਆ ਰੋਗੀ ਭਰੀ ਬਿਨ ਸ਼ਬਦ ਹੈ ਰੋਗ ਨਾ ਜਾਏ ਸਤਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਸਤਗੁਰ ਮਿਲੈ ਸੱਜਦਾ ਗਿਆਨ ਮਿਲ ਜਵੇ ਫਿਰ ਇਹਦੀ ਬਦੀਰਤਾ ਦੂਰ ਹੋ ਜਾਂਦੀ ਹੈ ਅੰਦਰੋਂ ਸਤਗੁਰ ਔਕੜ ਨਾਲ ਲਿਖਿਆ ਹੋਇਆ ਜੀ ਇੱਥੇ ਮਿਲੈ ਤਾਂ ਨਿਰਮਲ ਹੋਵੇ ਇਹ ਸਤਗੁਰ ਕਿਹੜਾ ਜੀ ਚੇਤਨਾ ਫਿਰ ਬੇੜਾ ਇਹਨੂੰ ਜਿਹੜਾ ਹੈ ਤਾਂ ਸੱਚ ਦਾ ਗਿਆਨ ਮਿਲਣਾ। ਕੀ ਤਨ ਕਹਿ ਲਿਆ ਹੈ ਸਤਗੁਰ ਉਕਲ ਵਾਲਾ ਵੀ ਹੋ ਸਕਦਾ ਸੱਚ ਦਾ ਗਿਆਨ। ਅੱਛਾ ਜੀ। ਸਤਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਈ। ਪਹਿਲਾਂ ਦੇਖੋ ਜਦ ਅਸੀਂ ਤਾਂ ਜਦਦਾ ਗਿਆਨ ਆਪਣਾ ਵਿਛੇ ਰੱਖ ਲੈਨੇ ਆ ਨਾ ਉਦੋਂ ਗੜਬੜ ਹੁੰਦੀ ਹੈ ਬਿਲਕੁਲ ਇੱਕ ਮੱਛਾ ਪਰ ਵੀ ਜੁਰਤ ਪਿਛਲਾ ਟਕਰਾ ਪੈਦਾ ਹੋ ਜਾਂਦਾ ਇਹੀ ਕਹਿ ਰਹੇ ਹਾਂ ਕਿ ਆਇਆ ਜਿਹੜੀ ਦੀ ਮਿਲਣ ਨਾਲ ਸਾਪਤੀ ਨਾਲ ਨਿਰਮਲ ਹੋਊਗੀ ਸਾਤਕੋੜ ਦੀ ਸਾਪਤੀ ਨਾਲ ਮਿਲਿਆ ਨਿਰਮਲ ਹੋਣੀ ਹੈ ਜੋ ਹੋਰ ਕੁਝ ਨਹੀਂ ਹੋਣਾ ਖਾਲੀ ਹੈ ਨਿਰਮਲ ਜੁਰ ਹੈ ਖਾਲੀ ਹੈ ਪਰ ਆਹ ਖਾਲੀ ਜਨਾ ਜਦ ਨਹੀਂ ਹਿਰਦਾ ਹੁੰਦਾ ਐਨਾ ਜਰ ਗਾਹਲ ਗੱਲ ਵੱਧੀ ਹੋਈ ਦੀ ਅੱਛਾ ਨਿਰਮਲ ਦਾ ਪਾਪ ਵੀ ਅਜੇ ਹਿਰਦਾ ਸਿਰਫ ਖਾਲੀ ਹੋਇਆ ਨਿਰਮਲ ਦਾ ਪਾਪ ਨਿਊਟਰਲ ਗੇ ਰਹੇ ਨਾ ਚੰਬਾ ਨਾ ਬੁੱਧਾ ਅਜੇ ਗਿਆਨ ਕੋਈ ਨਹੀਂ ਹੈ ਇਹ ਮਨ ਰਸੋ ਵੀ ਸਤਗੁਰੂ ਨੂੰ ਮਿਲਣ ਨਾਲ ਗੱਲ ਹੋਈ ਹੈ ਕਿ ਹਰ ਨਾਮ ਨੂੰ ਮਨ ਵਸਾਉਣ ਨਾਲ ਹੋਈ ਹੈ ਇਹ ਗੱਲ ਆਪ ਦਾ ਬਾਜਮਾਨ ਬਸੇ ਸਤਗੁਰੂ ਨੂੰ ਮਿਲਣ ਨਾਲ ਕਾਇਆ ਜਿਹੜੀ ਹੈ ਨਿਰਮਲ ਹੋ ਗਈ ਹੈ ਜੀ ਹੂੰ ਹਰ ਨਾਮ ਪਾਇਆ ਜਾ ਸਕਦਾ ਠੀਕ ਹੈ ਤੇ ਸਤਗੁਰ ਦਾ ਜਿਹੜਾ ਗਿਆਨ ਹੈਗਾ ਉਹ ਗੁਰਬਾਣੀ ਚ ਹੈ ਬਿਲਕੁਲ ਠੀਕ ਹੈ ਜੇ ਸਤਗੁਰ ਤੋਂ ਗਿਆਨ ਲੈ ਲਿਆ ਜਾਵੇ ਤਾਂ ਭਾਂਡਾ ਨਿਰਮਲ ਹੁੰਦਾ ਉਸ ਭਾਂਡੇ ਵਿੱਚ ਹੁਣ ਨਾਮ ਪਾਇਆ ਜਾ ਸਕਦਾ ਅਜੇ ਬਗੈਰ ਭਾਂਡੇ ਤੇ ਜਾਨ ਬਾਈ ਫਿਰਦੀ ਹੈ ਹਾਂਜੀ ਫਿਰ ਉਹ ਜਾਗ ਲੱਗ ਜਾਂਦਾ ਉਹ ਫਿਰ ਖੱਟਾ ਹੋ ਜਾਂਦਾ ਜੀ ਹਾਂ ਪਾण्डे ਨਰਮਲ ਹੈ ਨਹੀਂ ਗਿਆ ਪਹਿਲਾਂ ਪਾ ਲਿਆ ਖਾਲੀ ਨਹੀਂ ਕੀਤਾ ਨਾਨਕ ਨਾਮ ਧਿਆਇਆ ਸੁਖਦਾਤਾ ਦੁਖ ਵਿਸਰਿਆ ਤਹਜ ਸੁਭਾਏ ਨਾਨਕ ਰਾਮ ਤੇ ਆਇਆ ਸੁਖਦਾਤਾ ਨਾਨਕ ਨਾਮ ਤੇ ਆਇਆ ਸੁਖਦਾਤਾ ਸੁਖਦਾਤਾ ਨਾਮ ਤੇ ਆਇਆ ਇਹਦੇ ਕੋ ਸਰਬ ਸੁਖਣਾ ਸਰਬ ਸੁਖਾਂ ਦੀ ਦਾਤ ਦੇਣ ਵਾਲਾ ਤੇ ਆਇਆ ਹੈ ਅੱਛਾ ਜੀ ਉਹਦੇ ਨਾਲ ਧਿਆਨ ਜੋੜਿਆ ਨਾਮ ਨਾਲ ਜਿਹੜਾ ਸਾਰੀ ਸੁਖ ਦੇ ਸਰਬ ਸੁਖ ਠੀਕ ਹੈ ਜੀ ਠੀਕ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਈ ਦੁੱਖ ਜੈ ਸੁਭਾਈ ਬਚਰ ਗਏ ਅੱਪੇ ਤੋਂ ਸੁੱਖ ਕਾਪੇ ਹੀ ਗਏ ਸੁੱਖ ਪਲੌੜੇ ਦੀ ਪਏ ਜੋ ਕਾਪੇ ਭੁਲ ਗਏ ਜਸ ਸਰੋਵਰ ਭਰ ਗਿਆ ਸੁੱਖਾਂ ਦਾ ਦੁੱਖ ਤਾਂ ਪਤਾ ਹੀ ਨਹੀਂ ਲੱਗਿਆ ਕਿੱਧਰ ਚਲੇ ਗਏ ਠੀਕ ਹੈ ਜੀ ਦੁੱਖ ਪ੍ਰਭਾਵ ਛੋਟੇ-ਜੋਟੇ ਗੁਰ ਕੋ ਹਉ ਸਦਾ ਕੁਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਧੂ ਸੂਦਨ ਹਰ ਨਾਮ ਸੁਣਾਇਆ ਇਹ ਜਗ ਜੀਵ ਨੂੰ ਉਪਦੇਸ਼ਿਆ ਜਿਹਦੇ ਜਗ ਦਾ ਜੀਵਨ ਹੈ ਜਿਹੜਾ ਜਗ ਨੂੰ ਜੀਵਨ ਦੇਣ ਵਾਲੇ ਨੂੰ ਉਪਦੇਸ਼ ਜਗ ਨੂੰ ਜੀਵਨ ਦੇਣ ਵਾਲਾ ਜੀਵਨ ਦੇਣ ਵਾਲਾ ਜੀ ਕੇ ਜੀਵਨਾ ਅੱਜ ਤੇ ਫਰਕ ਪਹਿਜਣਾ ਹੈ ਅੱਛਾ ਜੀ ਜਗ ਨਾਲ ਤਾਂ ਮਨ ਜੁੜਿਆ ਹੋਇਆ ਜਗ ਜੀਵਨ ਇਹ ਜਗ ਸੱਚੇ ਕੀ ਹੈ ਕੋਸ਼ਣੀ ਉਹ ਕੀ ਹੈ ਚਿੱਤ ਪਤਾ ਹੈ ਚਿੱਤ ਖਤਰਾ ਹੈ ਇੱਕ ਸ਼ਬਦ ਜੀ ਕੇ ਜੀਵਨ ਮੋਏ ਨਾ ਬਸਾਰੋ ਮੈਂ ਜੰਮ ਤੇਰਾ ਅੱਛਾ ਉਹ ਚਿੱਤ ਜੀਵਨ ਹੈ ਇੰਪੋਰਟੈਂਟ ਨੇ ਇਹ ਭਗਤੀ ਹੈ ਕੋਈ ਭਗਤੀ ਹੈ ਅੱਛਾ ਸਾਰੇ ਇੱਕ ਬਾੜ ਗੋਦੂਏ ਸਾਰੇ ਮਸਲੇ ਹੱਲ ਕਰ ਦੂ ਜੇ ਜ਼ਿਹਰ ਤੇ ਰਹਿ ਜਵੇ ਕੇਤੇ ਰਹਿ ਜਵੇ ہاں ਜੰਗ ਜੀਵਨ ਨੂੰ ਜੇ ਅਸੀਂ ਜੱਤ ਲਾ ਲਿਆ ਲੋ ਇੱਥੇ ਸਾਰੇ ਕੁਝ ਗੜਬੜਾ ਦੂ ਆਪਣਾ ਠੀਕ ਹੈ ਜੀ ਆ ਰਚਨਾਰਾ ਹੈ ਜਿਹੜਾ ਇਹ ਜਗ ਜੀਵਨ ਇਹ ਕਿੰਨਾ ਚਿਰ ਚੱਗ ਨਹੀਂ ਬਿੱਚਾ ਸੁਤਾ ਤੇ ਦੇ ਵਿੱਚ ਬਾਇਆ ਤੇ ਉਹਨਾਂ ਸ਼ਰਮਾਇਆ ਜਿੰਦਾ ਹੈ ਜਾਂ ਦੇ ਡਗ ਜਿਨ ਜਗ ਜੀਵਨ ਉਪਦੇਸ਼ ਜਿਨ੍ਹਾਂ ਨੇ ਮਨ ਨੂੰ ਉਪਦੇਸ਼ ਦਿੱਤਾ ਹੈ ਜੀ ਜਿਨ੍ਹਾਂ ਨੇ ਉਪਦੇਸ਼ਿਆ ਠੀਕ ਹੈ ਜੀ ਇਸ ਗੁਰ ਸਦਾ ਕੁਮਾਈਆ ਇਸ ਗੁਰ ਕੋ ਕੋ ਕੋ ਜਾਂ ਹਰ ਰਸ ਬੋਲ ਤਿਸ ਗੁਰ ਕੋ ਖੰਨੀ ਐ ਜਿਨ ਮਦੂਸੂਦਨ ਹਰ ਨਾਮ ਸੁਣਾਇ ਮੈਂ ਆਪਣੀ ਹੋਪੇ ਨੂੰ ਜੋੜ ਜੋੜੀ ਕਰਕੇ ਉਹਦੇ ਅੱਗੇ ਚਲਾ ਲਾ ਹੋ ਖੰਦੀ ਠੀਕ ਹੈ ਜੀ ਜਿਨ ਮਦੂਸੂਦਨ ਹਰ ਨਾਮ ਸੁਣਾਇ ਜਿਹੜਾ ਕਿ ਬਹੁਤ ਮਿੱਠਾ ਆ ਨਾਮ ਦਿੱਤਾ ਠੀਕ ਹੈ ਜੀ ਇਸ ਗੁਰ ਕੋ ਹਵਾਰਣੇ ਜਿਨ ਹਮੇ ਬਿਕ ਸਭ ਰੋਗ ਸੀ ਉਹ ਵੀ ਕੱਢ ਲਿਆ ਹੋਂ ਮੇ ਦਾ ਜਿਹੜਾ ਸੀ ਨਾ ਮਾ ਜ਼ਹਿਰ ਜ਼ਹਿਰ ਬਿਕ ਜ਼ਹਿਰ ਹੁੰਦੀ ਇਹ ਰੋਗ ਸੀ ਗਵਾਤਾ ਚਾਰ ਤੇ ਮਦੂਸੂਤਨ ਉੱਧਰ ਕਰ ਦਿੱਤਾ ਲਿਆ ਅੱਡ ਠੀਕ ਹੈ। ਸਾਨੂੰ ਵਿੱਚੋਂ ਵੰਡ ਕੇ ਅਡੋਲ ਕਰਦੇ। ਤਿਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ। ਜਿੰਨਾ ਪੁੰਨ ਆ ਉਸ ਕੋ ਆਪ ਗੁਣ ਕੱਟ ਦਿੱਤੇ। ਗੋੜਾਂ ਜੇ ਉਹ ਇੱਕ ਪਾਸੇ ਕਰਤਾ ਉਹ ਗਣ ਪਾਸੇ ਕਰਤੇ। ਇਹ ਸਮਝਾਤਾ ਪਾਈ ਇਹ ਓਗੜ ਨੇ। ਰਜੋ ਤਮਸਾ ਤੋਂ ਉਪਰ ਨੇ ਇਹ ਸਮਝਾਏ ਨੇ। ਇੰਨੀ ਅੱਡਣੇ ਆਪਾਂ ਨੇ ਕਾਦੋ। ਠੀਕ ਹੈ। ਹਲੋ ਰਜੋ ਤਮਸਾ ਸਮਝ ਆਉਂਦੀ ਔਰ ਇਹੀ ਬੰਦੀਆਂ ਕੋ ਹੋਣਗੇ ਜੇ ਤੂੰ ਕੋ ਕੁਰਗੇ ਆਪਾਂ ਨਹੀਂ ਰਖਣੇ ਇਹ ਮਾਇਆ ਨੂੰ ਜੋੜ ਕੇ ਰੱਖਣ ਵਾਲੇ ਨੇ ਠੀਕ ਹੈ ਠੀਕ ਹੈ ਜੀ ਤੇ ਸਤਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਤ ਗੁਣੀ ਸਮਝਾਇਆ ਸੋ ਸਤਗੁਰ ਤਿੰਨ ਕੋ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ ਉਹਨਾਂ ਨੇ ਸਤਗੁਰੂ ਭੇਟੇ ਹੈ ਉਹਨਾਂ ਨੇ ਸਤਗੁਰੂ ਨਾਲ ਇੱਕ ਮਿੰਟ ਹੋਏ ਨੇ ਜਿਨ੍ਹਾਂ ਕੇ ਮੁਖ ਮਸਤਕ ਭਾਗ ਲਿਖ ਪਾਇਆ ਜਿਨ੍ਹਾਂ ਨੇ ਮੁਖ ਮਸਤਕ ਦੇ ਵਿੱਚ ਭਾਗ ਲਿਖ ਕੇ ਪਾਤਾ ਠੀਕ ਹੈ ਸੋ ਸਤਗੁਰ ਤਿੰਨ ਕੋ ਅਸੀਂ ਸਤਗੁਰ ਨੂੰ ਭੇਟਿਆ ਜੀ ਉਹਨਾਂ ਉਹਨਾਂ ਨੇ ਸਤਗੁਰ ਭੇਟਿਆ ਜਿਨ੍ਹਾਂ ਨੇ ਕੁਰਬਾਨੀ ਉਚਾਰੀ ਹੈ ਜੀ ਠੀਕ ਹੈ ਜੀ ਅ ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ